ਕੱਚ ਕਾਦੀ ਪਾਣੀ ਹੈ ਸੀਲ ਜੱਤ ਕੀ ਕੱਚ ਪੈ ਰ ਪਕੜੋ ਇਸ ਤਰ੍ਹਾਂ ਦਾ ਆਪਣਾ ਮਨ ਬਣਾਉਣਾ ਜੱਤ ਕੀ ਜਤਾ ਜੋ ਕੇ ਮੱਜਨ ਮੱਜਨ ਮੈਨੇ ਹੁੰਦਾ ਮੱਜਨ ਦਾ ਅਸਲੀ ਅਰਥ ਇਹ ਹੈ ਭਈ ਹਿਠਾਂ ਨੂੰ ਜਾ ਮੱਜਨ ਦਾ ਮਤਲਬ ਹੈ ਟੂਬੀ ਮਾਰਨੀ ਆ ਹੁਣ ਜਿਹੜੇ ਨਾ ਇਸ਼ਨਾਨ ਦੇ ਤਰੀਕੇ ਉਹਦੇ ਉੱਤੋਂ ਪਾਣੀ ਆ ਜਾਂਦਾ ਫੁਹਾਰਾ ਚੱਲਦਾ ਜੀ ਐ ਦੱਬਿਆ ਦੇ ਫੁਹਾਰਾ ਆ ਜਾਂਦਾ ਨਲਕਿਆਂ ਦੇ ਪਾਣੀ ਆ ਜਾਂਦੇ ਨੇ ਇਹ ਬਾਣੀ ਉਹਦੇ ਵੀ ਜਦੋਂ ਦਰਿਆ ਹੁੰਦੇ ਆ ਦਰਿਆ ਤੂੰ ਵੀ ਮਾਰਨੀ ਇਹਨੇ ਵੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੀਏ ਤੇ ਉਹਦਾ ਨਾਂ ਹੀ ਮਜਨ ਹੈ ਕਿੱਥੇ ਉਹ ਵੀ ਜਾ ਕੇ ਇਸ਼ਨਾਨ ਕਰੋਗੇ ਤੇ ਤੂੰ ਵੀ ਮਾਰੋਗੇ ਤੇ ਉਸ ਨਾਮ ਹੈ ਮਜਨ ਤੇ ਫਰਕ ਇਹ ਪੈ ਜਾਂਦਾ ਜੀ ਮਮਾ ਜਿੱਜਾ ਤੇ ਨੰਨਾ ਮਜਨ ਮਜਨ ਮਾਣੇ ਇਸ਼ਨਾਨ ਕਰਦਾ ਤੇ ਜਿੱਜੇ ਦੇ ਥੱਲੇ ਬਿੰਦੀ ਲਾ ਲਿਓ ਫਿਰ ਕੀ ਬਣ ਜਾਏਗਾ ਇੱਕ ਬਿੰਦੀ ਲੱਗੀ ਹੈ ਫਿਰ ਬਣ ਗਿਆ ਮਜਨ ਤੇ ਮਜਨ ਦਾ ਅਥਰ ਹੋ ਜਾਏਗਾ ਨਾ ਮਾਰ ਮਜ਼ਨ ਫਾਰਸੀ ਦਾ ਹੈ ਆ ਮਜ਼ਨ ਮਾਣੇ ਨਾ ਮਾਰ ਸਿਰਫ ਜੇ ਬਿੰਦੀ ਲਾਹ ਡਾਂਗੇ ਤੇ ਕਿਤੇ ਦਾ ਕਿਤੇ ਅਰਥ ਉਧਰ ਦਾ ਉਧਰ ਦੁਰ ਜਾ ਜੇ ਜੋਗ ਕੇ ਮੱਜਦ ਇਹਦਾ ਇਹ ਨਹੀਂ ਵੀ ਇਸ਼ਨਾਨ ਦਾ ਖੰਡਨ ਕੀਤਾ ਹੈ ਨਹੀਂ ਕਹਿੰਦੇ ਨੇ ਜੇ ਇਸ਼ਨਾਨ ਹੈ ਤੇ ਜੋਗ ਦਾ ਕਰ ਜੋਗ ਜੋਗ ਕੀ ਜੋੜ ਸਤਿਗੁਰਾਂ ਦੇ ਨਾਲ ਬੈ ਕੇ ਸਿਮਰਨ ਕਰ ਬੀਬੀ ਜਣੀ ਉਹਦੇ ਨਾਲ ਜੋੜ ਜੋ ਕਿ ਮੱਜਣ ਤੇ ਕਈਆਂ ਨੇ ਵੇਖਿਆ ਨਵੇਂ ਵਧਾਏ ਹੁੰਦੇ ਨੇ ਅੱਜ ਕੱਲ ਤੇ ਪਿਛਲੇ ਦੇ ਜੋਗੀ ਵਧਾਉਂਦੇ ਸਨ ਨਾ ਅੱਜ ਕੱਲ ਬੀਬੀਆਂ ਨੇ ਬੜੇ ਵਧਾਏ ਛੁੱਡੇ ਨੇ ਐਡੇ ਐਡੇ ਨਵੇਂ ਵਧਾਏ ਹੁੰਦੇ ਨੇ ਉਹ ਇਸੇ ਵਾਸਤੇ ਹੁੰਦੇ ਨੇ ਕਿ ਉਹਨਾਂ ਕੋਲ ਹੋਰ ਪੱਜਾਂ ਚੰਗਾ ਜੇ ਕੋਈ ਆ ਕੇ ਤੇ ਖਰੂਨ ਮਾਰ ਕੇ ਉਹਦੀ ਅੱਖਾਂ ਤੇ ਘੱਟ ਛੱਡਾਣੀ ਮੈਂ ਉਸ ਤੋਂ ਕੁਝ ਜੇ ਕਰਾਂਗੇ ਨਾ ਹੋਰ ਮੇਰੇ ਕੋਲ ਮੈਂ ਵੀ ਆਪਣਾ ਬਦਲਾ ਤੇ ਲੈ ਹੀ ਨਾ ਕਹਿੰਦੇ ਨੇ ਇਹਨੇ ਨਹੀਂ ਜੇ ਗੰਦ ਹੁੰਦਾ ਮੇਰਾ ਜੋਗ ਕੇ ਮੱਜਣ ਤੇ ਨੇਮ ਕੇ ਨਖਰ ਮਡਾਓ ਨੇਮ ਦੇ ਨਖਰ ਵਡਾਓ ਨੇਮ ਕੀ करना ਸਤਬੋਲ ਦਾ ਨੇਮ ਕਰ। ਛਿਨਾਨ ਕਰਨ ਦਾ ਨੇਮ ਜਿਤ ਕਰਮ ਜਿਹੜਾ ਇਹਦੇ ਤੇ ਨਿਤ ਕਰਮ ਤੇ ਫੇਰ ਅਰਜ਼ ਕਰਾਂਗਾ ਨਿਤ ਕਰਮ ਜ਼ਰੂਰ ਕਰਨਾ ਚਾਹੀਦਾ। ਇਹ ਛੱਡਣਾ ਨਹੀਂ ਚਾਹੀਦਾ। ਜਿਹੜਾ ਨਿਤ ਰੇ ਕਰਮ ਛੱਡ ਦੇਣਾ ਉਹ ਆਪ ਹੀ ਵੀ ਦੇਖਦੇ। ਨੇਮ ਕੇ ਨਖਨ ਵਡਾਓ। ਤੇ ਉਹਨੂੰ ਉਪਦੇਸ਼ ਦਿਓ ਆਪਣੇ ਆਪ ਨੂੰ ਵੀ ਜੇ ਕੋਈ ਕੰਮ ਕਰਨ ਲੱਗਾ ਚੋਰੀ ਆਈਏ ਤੇ ਤੂੰ ਉਸ ਵੇਸਵੇ ਆਖ ਉਹ ਤੈਨੂੰ ਗੁਰੂ ਨੇ ਕੀ ਹੁਕਮ ਕੀਤਾ ਸੀ ਉਹਦਾ ਗੁਰੂ ਦਾ ਜਿਹੜਾ ਉਪਦੇਸ਼ ਸਾਹਮਣੇ ਰੱਖੋ ਗਿਆਨ ਗੁਰੂ ਆਤਮ ਉਪਦੇਸ਼ੋਂ ਤੇ ਨਾਮ ਫਿਰ ਬੂਤ ਲਗਾਓ ਉਹ ਸਵਾਭ ਹੈ ਮਾਲਦੇ ਨੇ ਨਾ ਸਿਰ ਦੇ ਉੱਤੇ ਪਾਦੇ ਨਹੀਂ ਉਹਦੇ ਐ ਹੋ ਜਾਂਦਾ ਕੋਈ ਸੰਡੇ ਦਾ ਪ੍ਰਿੰਡਾ ਹੁੰਦਾ ਐ ਇਸੇ ਤਰ੍ਹਾਂ ਜਿਵੇਂ ਬਿਬੂਤੀ ਮਾਲ ਲੇਦੇ ਨੇ ਨਾ ਪਰ ਜਾਨਾ ਡਰਦੇ ਨੇ ਉਹਦੇ ਕੋਲ ਉਸ ਜੀਰ ਕਹਿੰਦੇ ਨੇ ਫਿਰ ਅਗੇ ਆਉਂਦੇ ਨੇ ਅਲਪ ਆਹਾਰ ਮਾੜੀ ਗੱਲ ਲਿਖ ਗਏ ਨੇ ਸਾਡੇ ਵਾਸਤੇ ਜਿਨ੍ਹਾਂ ਨੇ ਇਹ ਸਮਝੀ ਲਾ ਕੇ ਖਾ ਜਾਣੇ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਅਲਪ ਕਹਿੰਦੇ ਨੇ ਥੋੜਾ ਖਾਓ ਔਰ ਥੋੜਾ ਖਾ ਕੇ ਇਨਸਾਨ ਪਜ ਜਾਂਦਾ ਹੈ ਬਹੁਤਾ ਖਾ ਕੇ ਬਿਮਾਰ ਹੋ ਅਲਪ ਹਾਰ ਸੁਲਪ ਸੀ ਨਿੰਦਰਾ ਤੇ ਸੋਹ ਸੋਹ ਵੀ ਕੀ ਰੱਬ ਲੈਣਾ ਜਿੰਨਾ ਖਾਵ ਨਹੀਂ ਆਨਦੀ ਢੜੀ ਹੈ ਜੀ ਢੜੀ ਨੂੰ ਚੱਕ ਜਾਂਦੇ ਨੇ ਕਹੀ ਦੂ ਮੱਜਾ ਜਿੰਨਾ ਖਾ ਜਾਂਦੇ ਨੇ ਕਹੀ ਗੁਰਮੁਖਿਾਰੇ ਗੁਰੂ ਕਿ ਸਿਖੇ ਗੁਰੂ ਘਰ ਦਾ ਘਟ ਹੈ ਭਾਉ ਬੜੇ ਬੜੇ ਸਿਖੇ ਤੇ ਜੰਮੇ ਨੇ ਸੋ ਆਂਦੇ ਨੇ ਥੋੜਾ ਖਾਓ ਤੇ ਥੋੜਾ ਜਿਹਾ ਸਮੋਂ ਇਹਦੇ ਨਾਲ ਸਰੀਰ ਰਾਜ ਲੈਂਦਾ ਅਲਪ ਹਾਰ ਸੋ ਲਪਸੀ ਨਿੰਦਰਾ ਮੇਰਾ ਮਨਾ ਨਹੀਂ ਲੈਣਾ ਇੱਕ ਗੁਰਮਖ ਪਿਆਰਾ ਸੀ ਵਾਵਾ ਚੇਰ ਦੀ ਗੱਲ ਹੈ ਉਹ ਕੜਾ ਬੜਾ ਖੰਦਾ ਹੁੰਦਾ ਸੀ ਉਹਨੇ ਲੈ ਉਹਨਾ ਕੜਾ ਤੇ ਕੜਾ ਲੈ ਕੇ ਨਾ ਰਜ ਲੈਣਾ ਤੇ ਰਜ ਕੇ ਤੇ ਭੌਂ ਕੇ ਕੀ ਕਰਨਾ ਉਹਦਾ ਇੱਕ ਯਾਰ ਸੀ ਰੈਫਰਜਰੇਟਰ ਵਾਲਾ ਉਹ ਜਿਹੜਾ ਵਾਜਾ ਨਾਲ ਫਰਿਜ ਤਾਂ ਛੱਡਣਾ ਉਹ ਮੈਂ ਕਿਹਾ ਤੈਨੂੰ ਫੇਰ ਵੀ ਮਿਲ ਜਾਏਗਾ ਅੱਜ ਫੇਰ ਕੀ ਪਤਾ ਕਦੋਂ ਮਿਲਣਾ ਤੇ ਕਦੋਂ ਨਹੀਂ ਮਿਲਣਾ ਜਦੋਂ ਉਹ ਚਾਰਾ ਲੱਗਣਾ ਉਹਨੇ ਫਿਰਚੋਂ ਜਾ ਕੇ ਖਾ ਜਾਣਾ ਉਹ ਦੂਜੇ ਦਿਨ ਫਿਰ ਬਿਮਾਰ ਹੋ ਜਾਣਾ ਤੈਨੂੰ ਗੁਰੂ ਮੱਤ ਦੇ ਰੋਜ਼ ਮਿਲਦਾ ਤੇ ਦਇਆ क्षमा ਪ੍ਰੀਤ ਦਇਆ ਤੇ ਛਮਾ ਦੋ ਚੀਜ਼ਾਂ ਹਨ ਤਾਰਮਿਨ ਨਾਲ ਇਹਨਾਂ ਨਾਲ ਪਿਆਰ ਕਰ ਦਇਆ ਨਾਲ ਤੇ ਛਮਾ ਨਾਲ ਦਇਆ ਕੀ ਹੈ ਕੋਈ ਛਮਾ ਤੇ ਦਇਆ ਮਾਤਾ ਜੀ मैं मेला ਲਾਉਂਦੀ ਹੈ। ਪੁੱਤਰ अपनी ਮਾਂ कह रहे, ना ਨਾ मेले ਮੇਲੇ ਨਾਲ ਜਾ। ਅਹ ਜੀ ਕਿਉਂ? ਨਾਮਧਾਰੀਆਂ ਦੇ ਉਲਟ ਨੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਰਦੇਸ ਚਲੇ ਗਏ ਹਨ। ਇਹ ਜਿਹੜੇ ਅਕਾਲੀ ਸਿੰਘ ਤੇ ਨਿਆੰਗ ਨੇ ਨਾਮਧਾਰੀ ਨੂੰ ਵੇਖ ਨਹੀਂ ਸਕਦੇ ਇਹਨਾਂ ਦਾ ਜੇ ਵਸ ਚਲੇ ਤੇ ਨਾਮਧਾਰੀਆਂ ਨੂੰ ਧਰਤੀ ਤੇ ਨਾ ਫਿਰਨ ਦੇਣ ਤੇ ਸਾਰੇ ਉਹ ਕਹਿੰਦਾ ਮਾਤਾ ਜੀ ਗੁਰਦੁਆਰੇ ਕੋਈ ਉਹਨਾਂ ਦੇ ਨੇ ਕੋਈ ਜ਼ਾਰ ਖਰੀਦ ਜਗਾ ਤੇ ਨਹੀਂ ਅਸੀਂ ਵੀ ਗੁਰੂ ਦੇ ਸਿੱਖਾਂ ਅਸੀਂ ਵੀ ਗੁਰੂ ਗੋਬਿੰਦ ਸਿੰਘ ਰਿਆਂ ਕੀ ਹੋਇਆ ਅਗੋਂ ਗੁਰੂ ਰਾਮ ਸਿੰਘ ਦਾ ਉਹ avatars ਹੋਏ ਨੇ ਤੇ ਸੀ ਉਹਨਾਂ ਨੂੰ ਵੀ ਮੰਨਣਿਆ ਉਹਨਾਂ ਦੇ ਤੇ ਮੱਤ ਤੇ ਪਰਦਾ ਪਿਆ ਤਾਂ ਨਹੀਂ ਜਾਂਦੇ ਤੇ ਗੁਰਦੁਆਰੇ ਕਿਉਂ ਨਾ ਮੈਂ ਜਾਵਾਂ ਦਰਸ਼ਨ ਕਰ ਪੁੱਤ ਮੇਰਾ ਜੀ ਨਹੀਂ ਕਰਦਾ ਵੀ ਤੂੰ ਜ਼ਰੂਰ ਜਾ ਕਹਿੰਦਾ ਜੀ ਮੈਂ ਜ਼ਰੂਰ ਜਾਣਾ ਮੁਕਸਰ ਮੱਥਾ ਟੇਕਣ ਜਾਣਾ ਮਾਗੀਤੀ ਕਹਿੰਦੀ ਹੈ ਮਾਂ ਆਂਦੀ ਏ ਪੁੱਤਰ ਚੰਗਾ ਤੇਰੀ ਮਰਜ਼ੀ ਅੱਗੇ ਤੇਰਾ ਪੁੱਤਰ ਸ਼ਹੀਦ ਹੋ ਗਿਆ ਮਲੇਰਕੋਟਲੇ ਤੇ ਮੈਨੂੰ ਉਹਦਾ ਹੀ ਦੁੱਖ ਨਹੀਂ ਭੁੱਲਦਾ ਕੋਈ ਉਥੇ ਵਖੇਬਤਾ ਨਾ ਹੋ ਜਾ ਨਾਲੇ ਮੇਲਿਆਂ ਵਿੱਚ ਡਾਕੀ ਪੈ ਜਾਂਦੀ ਏ ਡਾਕੀ ਅਸੀਂ ਚੰਦਰੀ ਬਿਮਾਰੀ ਏਕ ਮਿੰਟ ਵਿੱਚ ਹੀ ਅਗਲੇ ਦੇ ਸਵਾਸ ਨਿਕਲ ਜਾਂਦੇ ਨੇ ਤੇ ਪੁੱਤ ਨਾ ਜਾਏ ਤੇ ਚੰਗੀ ਗੱਲ ਕਹਿੰਦਾ ਨਹੀਂ ਮਾਪਾ ਜੀ ਮੇਰੇ ਮਨ 'ਚ ਬੜੀ ਖਾਸ਼ੀ ਮੈਂ ਜਾ ਕੇ ਦਰਸ਼ਨ ਕਰਕੇ ਆਵਾਂ ਅੱਛਾ ਪੁੱਤ ਜੇ ਤੂੰ ਜਾਣਾ ਤੇ ਚਲਾ ਜਾ ਇਹ ਲੋਕਾਡ ਦਾ ਅਤਰ ਸਿੰਘ ਸੀ ਜਿਹੜਾ ਆਪਣੀ ਮਾਂ ਨਾਲ ਗੱਲਾਂ ਕਰਦਾ ਕੰਡੀ ਚੰਗਾ ਪੁੱਤ ਚਲਾ ਗਿਆ ਪਰ ਛੇਤੀ ਆ ਜੇ ਜਦ ਤੱਕ ਤੂੰ ਨਾ ਨਾ ਆਏਗਾ ਮੇਰਾ ਖਿਆਲ ਉਧਰ ਹੀ ਰਹੇ ਨਾ ਮਾਲ ਜੀ ਮੈਂ ਮੱਥਾ ਟੇਕ ਕੇ ਆ ਜਾਣਾ ਗੱਲ ਤੇ ਕੋਈ ਨਹੀਂ ਚਲਾ ਜਾ ਜਿਸ ਵਕਤ ਤੱਕ ਸਿੱਧੀ ਪੱਗ ਬੱਦੀ ਏ ਰਾਜਮਾਲਾ ਪਾਈ ਹੱਥ 'ਚ ਗੜਵਾ ਫੜਿਆ ਮੋਢੇ 'ਤੇ ਆਸਣ ਏ ਤੇਰਖ ਸ਼ਹਿਦਾ ਕੈਸਾ ਸੁੰਦਰ ਦਿਦਾਰਾ ਤੁਰਿਆ ਤੁਰਿਆ ਜਿਸ ਵਕਤ ਮੁਖਸਰ ਜਾ ਕੇ ਦਰਸ਼ਨ ਕਰਨ ਲੱਗਾ ਆ ਇੱਕ ਭਾਈ ਜਿਹੜਾ ਗੁਰਦੁਆਰੇ ਦਾ ਨੌਕਰ ਸੀ ਪੈਸਿਆਂ ਨਾਲ ਉੱਥੇ ਨੌਕਰ ਸੀ ਜਿਹੜਾ ਉਹ ਆ ਗਿਆ ਤੇ ਕਹਿੰਦਾ ਓਏ ਕਿਦਰ ਮੂੰ ਚੁੱਕੀ ਆਉਣਾ ਕਹਿੰਦਾ ਜੀ ਸਤਗੁਰਾਂ ਦਾ ਸਥਾਨ ਹੀ ਉੱਥੇ ਦਰਸ਼ਨ ਕਰਨ ਆਇਆ ਸਥਾਨੇ ਦਰਸ਼ਨ ਕਰਨ ਆਇਆ ਤੂੰ ਕਿਤੇ ਕੋਕਾਤ ਨਹੀਂ ਜਾਪਦਾ ਤੇਰੀ ਸ਼ਕਲ ਸ਼ੁਬਾ ਤੇ ਉਸੇ ਤਰ੍ਹਾਂ ਜਾਪਦੀ ਏ ਗੜਵਾ ਫੜਿਆਈ ਠੀਬੀ ਜੀ ਪੱਗ ਵਧਈਆ ਆ ਗੱਲ ਚ ਗਾਨੀ ਪਾਈ ਹੋਈ ਆ ਤੂੰ ਕੋਕਾ ਨਹੀਂ हां जी मैं साधु राम सिंह दा सिख हां ओए गुरु नु मानदा जेड़ा मुसलमान ने कलाम कदे मुसलमान क्यों नहीं बन के जदों तौडा गुरु मुसलमान की कलाम पढ़दा ते तुसी किवें इस तरह इसत पौंदी पौंदे ਕਹਿੰਦਾ ਵੀ ਬੁਰਮਖਾ ਇਹ ਜਿਹੜੀਆਂ ਗੱਲਾਂ ਨਹੀਂ ਕਰਿੰਦੀਆਂ ਤੇ ਮੈਂ ਮੱਥਾ ਟੇਕਣਾ ਮੈਂ ਤੇਰਾ ਕੋਈ ਸ਼ੁੱਕਤ ਨਹੀਂ ਲੈ ਕੇ ਚਲਿਆ ਜਾ ਥੋਪਿਸ਼ਾ ਨੱਠ ਜਾ ਉਤੋਂ ਅਕਾਲ ਬੁੰਗੇ ਤੋਂ ਅਕਾਲ ਪੱਤ ਤੋਂ ਤੇ ਨਾ ਕਲਾਮ ਪੜ੍ਹਦੇ ਨੇ ਇਹ ਨੱਚਦੇ ਨੇ ਇਹਨਾਂ ਨੂੰ ਇਸ ਤਰ੍ਹਾਂ ਅਪਹਾਲ ਪੈਂਦਾ ਕਿਸਾਂ ਵੀ ਬਿਰਦੀ ਕਰਦੇ ਨੇ ਪਿੱਛਾ ਚਲਾ ਜਾ ਜੇ ਕੋਈ ਹੋਰ ਸੁਣ ਲਿਆ ਤਾਂ ਫੇਰ ਸਮਝੋ ਪਤਾ ਨਹੀਂ ਤੇਰੇ ਨਾਲ ਕੀ ਕਰੇ ਕਹਿੰਦਾ ਮੈਂ ਕੁਝ ਨਹੀਂ ਕਰਦਾ ਅੱਤ ਤੈਨੂੰ ਆਖਿਆ ਜਿਉ ਚਲੇ ਇਹ ਰੌਲਾ ਪੈਂਦੀਆਂ ਪੈਂਦੀਆਂ ਹੋਰ ਵੀ ਪੰਜ ਸੱਤ ਸਿੜੀ ਉੱਥੇ ਇਕੱਠਾ ਜਦੋਂ ਸਾਰੇ ਇਕੱਠੇ ਹੋ ਗਿਆ ਹੁਣ ਉਹ ਨਾਮਤਾਰੇ ਸਿੰਘ ਇਕੱਲਾ ਤੇ ਉਹ ਆਂਦਾ ਹੈ ਭਗਵਾਨ ਕੀ ਮੈਂ ਕਰਾਂ ਇਹ ਉਹ ਪੁਜਾਰੀ ਨੇ ਜਿਨ੍ਹਾਂ ਗੁਰੂ ਤੇਗ ਬਹਾਦਰ ਨੂੰ ਉੱਥੇ ਵੜਨ ਦੀ ਇਹ ਉਹ ਪੁਜਾਰੀ ਨੇ ਜਿਨ੍ਹਾਂ ਗੁਰੂ ਰਾਮ ਸਿੰਘ ਦੀ ਅਰਦਾਸ ਨਹੀਂ ਸੀ ਹੁੰਦੀ ਸੀ ਇਹ ਉਹ ਪੁਜਾਰੀ ਨੇ ਜਿਨ੍ਹਾਂ ਨੇ ਪੂਜਾ ਦਾ ਧਾਨ ਖਾ ਖਾ ਕੇ ਦੇ ਇਨਾਂ ਦੀ ਅੱਖਾਂ ਤੇ ਛੋਹ ਤੇ ਇਨਾਂ ਦੀ ਮੱਤ ਮਾਰੀ ਓਏ ਪੂਜਾ ਦਾ ਧਾਨ ਤਰ ਮਸਾਲਾ ਆਪਣੀਆਂ ਟਿੱਕੀਆਂ ਤੇ ਤਿੰਨ ਕੰਮ ਕਰੇ ਨ ਪਹਿਲਾ ਮਤ ਮਾਰਨ ਤੇ ਫਿਰ ਜੋੜੀ ਪੀਰਾਂ ਤੇ ਫਿਰ ਤੁਰਨ ਫਿਰਨ ਦਾ ਦੇ ਤਿੰਨ ਕੰਮ ਕਰਦੀਆਂ ਨੇ ਭਾਈ ਗੁਰਦਾਸ ਨੇ ਲਿਖਿਆ ਨਾ ਜੋ ਮਰਿਆ ਦਾ ਹਿੰਦਵਾਦ ਆਵਾਸ ਆਖਾਜ ਮੁਸਲਮਾਨਾ ਸੂਰੀਓ ਵਿਆਜ ਹਵਾ ਨਾ ਖਾਈ ਚੂਹਰਾ ਮਾਮੋਤਾ ਹੋਰੇ ਕਾਰਜਵਾਯਾ ਪਾਣੀ ਮਬਰਾਜ ਤਨਮੁਸਾਲ ਦੀ ਚੌਗ ਆਵਿਓ ਖੰਡੂ ਪਾਜ ਜੋ ਮੱਖੀ ਮਿੱਠੇ ਮਰੇ ਕਿਸ ਹੋਏ ਅਖਾਜ ਕਹਿੰਦੇ ਨੇ ਉਹਦੀ ਮੱਤ ਮਾਰੀ ਇਹ ਸਤਿਗੁਰੂ ਆਮ ਸਿੰਘ ਸੱਚੇ ਪਾਤਸ਼ਾ ਇਹਨਾਂ ਨੂੰ ਮੱਤ ਦੇ ਇਹਨਾਂ ਨੂੰ ਸਿੱਖ ਵਿੱਚ ਗੁਰੂ ਵੇਖਣ ਦੀ ਸ਼ਕਤੀ ਬਖਸ਼ ਇਹ ਅਜੇ ਗੱਲਾਂ ਕਰਦੇ ਸੀਣ ਇੱਕ ਆ ਜਾਣਾ ਥੋ ਕਿ ਨਹੀਂ ਜਾਂਦਾ ਸਿਰ ਪਾਟ ਤੇ ਉਸ ਨੇ ਅੱਗੋਂ ਕੀ ਆਖਿਆ ਆਂਦਾ ਤਨ ਸਤਗੁਰੂ ਨਾਮ ਸਿੰਘ ਸੱਚੇ ਪਾਤਸ਼ਾਹ ਅੱਛਾ ਸਿਖਾ ਤੇਰਾ ਗੁਰੂ ਨਾਮ ਸਿੰਘ ਪੜਾ ਕੇ ਉਹ ਸਿਖਾ ਤੇਨੂੰ ਹੀ ਸਤਗੁਰੂ ਨਾਮ ਸਿੰਘ ਆਖਾ ਬਖਸ਼ੇ ਕਿ ਤੈਨੂੰ ਸਤਗੁਰੂ ਨਾਲ ਦਰਸ਼ਨ ਹੋਏ ਸਿੱਖਾਂ ਦੇ ਵਿੱਚੋਂ ਇਨਿਕਾ ਲਾ ਕੇ ਸਿਰ ਫੜ ਲਿਆ ਆਪਣੀ ਤਰਫਲਾ ਆ ਗਿਆ ਉਥੇ ਆ ਕੇ ਨਾ ਸਿੱਖਾਂ ਨੇ ਵੇਖਿਆ ਸਿੱਖਾਂ ਨੇ ਦੱਸੀ ਸਾਰੀ ਗੱਲ ਉਹਨਾਂ ਨੇ ਉਹਦੀ ਟੀਮਾਰਦਾਰੀ ਕੀਤੀ ਲੋਹ ਪੂੰਜਿਆ ਉਹ ਇੱਕ ਦੋ ਦਿਨਾਂ ਵਿੱਚ ਹੀ ਅਦਕ ਕੁਦਰਤ ਮਹਾਰਾਜ ਦੀ ਅਸੀਰਤੀ ਉਸੇ ਸ਼ਹਿਰ ਦੇ ਵਿੱਚ ਉਥੇ ਹੀ ਡਾਕੀ ਦੀ ਬਿਮਾਰੀ ਪੈ ਤੇ ਜਦੋਂ ਡਾਕੀ ਦੀ ਬਿਮਾਰੀ ਪਾ ਗਈ ਇਹ ਐਸੀ ਛੂਤ ਦੀ ਬਿਮਾਰੀ ਹੈ ਕੋਲ ਵੀ ਜਾਓ ਤੇ ਸਮਝੋ ਬਿਮਾਰੀ ਲੱਗ ਗਈ ਮਾਵਾ ਪੁੱਤਰਾਂ ਨੂੰ ਛੱਡ ਕੇ ਨਸ ਗਈਆਂ ਇਸਤਰੀਆਂ ਪਤੀਆਂ ਨੂੰ ਛੱਡ ਕੇ ਨੱਟ ਗਈਆਂ ਭੈਣਾ ਵੀਰਾਂ ਨੂੰ ਛੱਡ ਕੇ ਨੱਟ ਗਈਆਂ ਰੋਟੀਆਂ ਪਰਲਾਉਂਦਿਆਂ ਨੂੰ ਛੱਡ ਕੇ ਆਪਣੀ ਜਾਨ ਪਿਆਰੀ ਕਰਨ ਵਾਸਤੇ ਸਾਰੇ ਨੱਟ ਜਾਂਦੇ ਨੇ ਬਾਊ ਇੱਕ ਮਾਈ ਸੀ ਲੜਕੀ ਦਾ ਨਾਮ ਸੀ ਕ੍ਰਿਸ਼ਨਾ ਕ੍ਰਿਸ਼ਨਾ ਹੋ ਗਈ ਬਿਮਾਰ ਤੇ ਆਦੀਏ ਨਹੀਂ ਕ੍ਰਿਸ਼ਨਾ ਤੇਰੀ ਮੌਤੇ ਮੈਂ ਮਰ ਜਾ ਤੇਰੀ ਮੌਤ ਮੈਨੂੰ ਆ ਜਾ ਕ੍ਰਿਸ਼ਨਾ ਮੈਂ ਮਰ ਜਾਵਾਂ ਕੁਦਰਤ ਮਾਰਦੀ ਉਹਨੇ ਸੁਣਿਆ ਸੀ ਵੀ ਜੰਮ ਜੜੇ ਹੁੰਦੇ ਨੇ ਨਾ ਉਹਨਾਂ ਦੀਆਂ ਅੱਖਾਂ ਹਰ ਤਰ੍ਹਾਂ ਦੀਆਂ ਤੇ ਉਹ ਇੱਕ ਬਿੱਲਾ ਸੀ ਉਸਨੇ ਕਿਸੇ ਦਾ ਦੁੱਧ ਪੀਣ ਲਗਾ ਤੇ ਉਹਨੇ ਮਾਂ ਦੀ ਡਾਂਗ ਤੇ ਚਾਟੀ ਟੁੱਟ ਗਈ ਤੇ ਉਹ ਜਿਹੜਾ ਚਾਟੀ ਦਾ ਗੋਲਾ ਸੀ ਨਾ ਉੱਤੇ ਉਹ ਬਿੱਲੇ ਦੇ ਗੋਲ ਵਿੱਚ ਹੀ ਰਹਿ ਗਿਆ ਜਦੋਂ ਗਲ ਵਿੱਚ ਰਹਿ ਗਿਆ ਨਾ ਤੇ ਉਹ ਆ ਗਿਆ ਉਹ ਜਿਸ ਵਕਤ ਆਇਆ ਤੇ ਉਹ ਉਹਨੇ ਅੰਨੇਰੇ ਵਿੱਚ ਅੱਖੀਆਂ ਖੀਚੀਆਂ ਤੇ ਉਹ ਆਂਦੀ ਫਿਰ ਜੰਮ ਲੈ ਆ ਆ ਗਿਆ ਨੇ ਕ੍ਰਿਸ਼ਨਾਂ ਨੂੰ ਤੇ ਆਂਦੀਏ ਵੇਲ ਜਾਵਾ ਵੇਲ ਜਾਵਾ ਆ ਕੇ ਵਿੱਚ ਉਹਨੋਂ ਕਦੇ ਜਮਾ ਕਿਸਾਨ ਤੋਂ ਜੋ ਕਹੇ ਸੀ ਕਿ ਮੈਨੂੰ ਇਹਨਾਂ ਫੜ ਕੇ ਲੈ ਦੇ ਸੋ ਪਾਉ ਜਦੋਂ ਆਪਣੇ ਬਣ ਜਦੇ ਸਾਰੇ ਹੀ ਛੱਡ ਜਾਂਦੇ ਨੇ ਉਸ ਵਕਤ ਪਾਕਿਸਤਾਨ ਨੇ ਬੜਾ ਵੱਡਾ ਜਲਸਾ ਵੇਖਿਆ